श्लोक महला तीसरा उनव उनव आया वर्षै लाए चढ़ी नानक भाणा चलै कंतकै सो माने सदा रली उनव उनव आया ओला झुक आया नेडे होके, के धरती हो दे रेड़े जाल बदल हो जाता झुक के आंदा ता ऊधो वे कहंदे जे ने आकाश दूर ਉਹ ਬਰ ਬਿਲਕੁਲ ਥੱਲੇ ਉਤਰਿਆ ਆ। ਉਹ ਨਵ ਉਹ ਨਵ ਆਇਆ ਵਰਖਾ ਲਾਇ ਛੜੀ ਵਰਖੀਆ ਛੜੀ ਲਾਤੀ ਲਗਾਤਾਰ ਵਰਸ ਰਿਹਾ ਛੜੀ ਨਵ ਲਗਾਤਾਰ ਵਰਸ ਰਿਹਾ। ਇੱਕੋ ਰਸ। ਨਾਲੇ ਤੋਂ ਪਾਣੀ ਚੱਲਣਾ ਕਰਤ ਕੇ। ਇਹ ਕਿਹੜਾ ਹੁਕਮ ਹੈ ਹੁਕਮ ਆ ਰਿਹਾ ਅਸਲ ਵਿੱਚ ਲਗਾਤਾਰ। ਇਹ ਵਰਖਾ ਹੁਕਮ ਦੀ ਹੋ ਰਹੀ ਆ। ਜੇ ਇਹ ਪਾਣੀ ਚੱਲੇ ਹੁਕਮ ਦੇ ਵਿੱਚ ਚੱਲੇ। पाने कंले कंते के सोने सदा सधारली बा समझ लो सदाई सदाई शौक बड़ूगी बुद्धि नु क्या जा रहे हैं आ जी हां जी हां बबे बुद्धि नु ठीक है जी ते कंंत इथे फिर चितते ही है जी हां कंंत शब्द है हुण बुद्धि विवेक होगी अच्छा जी जब विवेक हो के जी नु रहना पओ जी मन तो सब है ਤੇ ਸਦਾ ਰਲੀ ਰਹੇਗੀ ਇਹ ਸੱਚਖੰਡ ਦੇ ਵਿੱਚ ਹੈ ਜੀ ਹਾਂ ਸਦਾ ਰਲੀ ਆਮਦੀ ਰਹੇਗੀ ਜੋ ਜੀ ਮਹੱਲਾ ਤੀਜਾ ਕਿਆ ਉਠ ਉਠ ਦੇਖੋ ਬਪੜੇ ਇਸ ਮੇਘੇ ਹੱਥ ਕਿਛ ਨਾਹੀਂ ਜਿਨੇ ਤਿਸ ਰਾਖੋ ਮਨ ਕੋਈ ਇਹ ਮੇਰੇ ਨੂੰ ਦੇਖੇ ਕੋਈ ਉਸ ਆਦਮੀ ਨੂੰ ਦੇਖੇ ਜਿਹੜਾ ਗੁਰੂ ਦੀ ਗੱਲ ਕਰ ਰਿਹਾ ਪਰਮੇਸ਼ਰ ਦੀ ਮਰਬਾਨੀ ਦੀ ਮੈਨੂੰ ਉਹਨਾਂ ਦੇਖੋ ਮੇਰੇ ਹੱਥ ਕੁਝ ਵੀ ਨਹੀਂ ਹੈ ਕਿਸ ਮੇਰੇ ਹੱਥ ਕੁਝ ਮੇਰੇ ਹੱਥ ਥੇ ਕੁਝ ਨਹੀਂ ਹਾਲਤ ਦੇ ਜਿਹਨੇ ਇਹ ਮੇਗ ਪਠਾਇਆ ਜਿਹੜੇ ਹੁਕਮ ਨੇ ਇਹ ਮੇਗ ਫੈਰ ਕੀਤਾ ਮੇਰਾ ਬੁੱਲ ਫੈਰ ਕੀਤਾ ਤੇ ਸਰਾ ਬੋਹੇ ਕਿ ਕਰ ਰਿਹਾ ਤੇ ਅਸੀਂ ਅੱਜ ਕੀ ਕਰ ਰਹੇ ਹਾਂ ਸ਼ਬਦਾਇ ਹੀ ਪਠਾਇਆ ਉਹ ਸ਼ਬਦ ਦੀ ਗੱਲ ਆ ਸ਼ਬਦ ਗੁਰੂ ਅਸੀਂ ਗੁਰੂ ਗ੍ਰੰਥ ਨੂੰ ਸ਼ਬਦ ਗੁਰੂ ਕਹਿਣ ਲੱਗੇ ਉਹ ਗੁਰੂ ਤਾਂ ਟੱਕਣ ਦਾ ਨਹੀਂ ਜੋ ਆਦਮੀ ਬੋਲਿਆ ਸੀ ਉਹ ਅੱਖਰ ਲਿਖੇ ਤੇ ਨੂੰ ਉਹਦਾ ਤਾਂ ਤੇ ਪੋਤੀ ਜਾਵਦੇ ਇੱਥੋਂ ਤਾਂ ਤੁਸੀਂ ਲੈਣ ਹੈ ਸਭ ਕੁਝ ਇਹਦੇ ਵਿੱਚ ਪਰ ਲੈਣੋ ਤੁਸੀਂ ਜੇ ਮੱਥਾ ਟੇਕਿਆ ਤੇ ਨਹੀਂ ਕੁਝ ਮਿਲਣਾ ਪਾਠ ਕਰੇ ਤੇ ਨਹੀਂ ਕੁਝ ਮਿਲਣਾ ਵਿਚਾਰੇ ਤੇ ਮਿਲਣਾ ਲੋ ਪਹਿਲਾਂ ਵੀ ਔਰ ਹੁਣ ਵੀ ਚੇਤਨ ਵਾਸਤੇ ਆਇਆ ਹੈ ਜੀ ਚੇਤਨ ਵਾਸਤੇ ਆਇਆ ਚੇਤਨ ਫਿਰ ਵੀ ਇਹ ਕਹੇ ਤੋ ਬੇਦ ਬੜਾ ਕਿਹਾਂ ਤੇ ਆਇਆ ਬੇਦ ਬੜਾ ਤੇ ਕਿੱਥੋਂ ਬੇਦ ਆਇਆ ਉਹ ਬੜਾ ਜਿਹੜੇ ਹਿਰਦੇ ਵਿੱਚੋਂ ਬੇਦ ਆਇਆ ਚੇਤਨ ਦੇ ਬੇਦ ਬੋਲੇ ਉਹ ਬੜਾ ਚੇਤਨ ਬੜਾ ਜਾਂ ਢੀ ਬੜਾ ਸਾਬ ਗੱਲ ਉਹ ਤੇ ਪਰ ਐਸਾ ਪ੍ਰਚਾਰ ਕਰ ਲਿਆ ਉਲਟਾ ਉਹ ਇਹ ਐਸੇ ਉਲਟੇ ਫਸੜੇ ਪ੍ਰਚਾਰ ਕਰਕੇ ਪੱਲੇ ਦਾ ਭਾਵੇਂ ਕੁਝ ਨੀ ਪੈਂਦਾ ਕਿਸੇ ਨਾਲ ਤਣਦੇ ਹੋ ਗਏ ਕੂਰਖ ਹੋ ਗਏ ਲੋ ਜੀ ਗੁਰੂ ਗ੍ਰੰਥ ਸਾਹਿਬ ਨੂੰ ਇਹ ਕਹਿੰਦਾ ਤੁਸੀਂ ਲਿਆ ਕੀ ਆ ਤਾਂ ਤਾਂ ਢੋਡਾ ਜਿਹਾ ਲਿਆਓ ਬਈ ਕੁਝ ਉੱਥੇ ਦਿਖਾਓ ਕੀ ਲਿਆ ਸਾਬਤ ਕਰੋ ਤੁਸੀਂ ਗੁਰੂ ਆ ਗੁਰੂ ਤੁਸੀਂ ਸਾਬਤ ਕਰਨ ਗੁਰੂ ਆ ਜੇ ਤੁਹਾਡੇ ਕੋ ਗਿਆਨ ਹੈ ਗੁਰੂ ਆ ਫਿਰ ਸਾਬਤ ਹੋਊਗਾ ਗੁਰੂ ਮੈਂ ਪਰ ਨਾ ਕੁਝ ਸਾਬਤ ਹੁੰਦਾ ਤੁਸੀਂ ਸਾਬਤ ਕਰਨੇ ਗੁਰੂ ਆ ਉਸੀ ਸ਼ਬਦ ਕਰਦੇ ਪੀ ਅਸੀਂ ਕਾਲਜ ਕਰਾਏ ਥੋੜਾ ਤਾਂ ਆਖਰੀ ਉਹਦਾ ਕਾਲਜ ਕਰਾ ਲਿਆ ਫਿਰ ਉਹ ਬਿਲਡਿੰਗ ਦਾ ਉਹ ਜੀ ਤਾਂ ਮੇਕ ਜਿਹੜਾ ਹੈ ਇਹ ਗਿਆਨ ਦਾ ਪ੍ਰਤੀਕ ਬੋਲਣ ਵਾਲਾ ਖਰੀ ਨਾਮ ਅਖਰੀ ਸਾਲਾ ਅਖਰੀ ਜਾਨ ਗੀਤ ਗੁਰ ਦਾ ਅਖਰੀ ਲਿਖਣ ਲਿਖੇ ਅਖਰ ਦੇ ਬੋਲਣ ਬਾਣ ਤੇ ਬਾਣੀ ਬਣਨੀ ਹੈ ਬੋਲੇ ਤੇ ਸ਼ਬਦ ਬਣਨ ਬੋਲਣ ਬਾਣ ਅੱਖਰਾਂ ਫਿਰ ਅੱਖਰਾਂ ਦੇ ਜੋ ਜੋ ਕੋ ਬਖਾਨ ਸਜੋ ਕਿਵੇਂ ਹੋਏ ਨਾ ਤਾਂ ਕਿਆ ਅੱਖਰਾਂ ਦੇ ਜੋ ਬਈ ਜੇ ਮੈਂ ਲਿਖਿਆ ਨਾ ਜੇ ਫਰਮਾਇ ਤੇ ਤੇ ਪਾਏ ਲੈ ਤਾਂ ਉਹ ਮੇ ਪਾਤੇ ਅੱਖਰ ਜਿਵੇਂ ਬਦੂ ਫਰਮਾਨ ਹੋਇਆ ਫਰਮਾਨ ਕਿਨੂੰ ਹੋਇਆ ਵੇggenੂ ਹੋਇਆ ਅੱਖਰਾਂ ਨੂੰ ਫਰਮਾਨ ਹੋ ਆ ਬਰਸੋ ਕਿਰਪਾਤਾ ਵੇggenੂ ਫਰਮਾਨ ਹੋਇਆ ਵੇggen ਨੇ ਅੱਖਰ ਪਾ ਲਿਖ ਦਿੱਤੇ ਅੱਖਰ ਬੜੇ ਨੇ ਮੇਦਾ ਬੜਾ ਨੇ ਕਹਿੰਦਾ ਕਹਿੰਦਾ ਵੀ ਨਹੀਂ ਬੜਾ ਜਿਨੇ ਮੈਨੂੰ ਇਸ ਰਾਤ ਨੂੰ ਮਨ ਬਈ ਜਦੋਂ ਮੇਰੇ ਤੇ ਚੇਂਦੂ ਬ੍ਰਾਊਜ਼ਰ ਉਹਦੇ ਨਾਲ ਸਿਆਣ ਜੋੜੋ। ਨਾ ਮੇਰੇ ਨਾਲ ਜੋੜੋ ਨਾ ਅੱਖਰਾਂ ਨਾਲ ਜੋੜੋ। ਇੱਥੇ ਕਈ ਗੱਲ ਪਾਰ ਬਰਮ ਨਾਲ ਜੋੜੋ। ਘਰ ਜਾਣਾ ਉੱਥੇ ਜਾਣਾ ਦਰਗਾਹ ਤੇ। ਜੇ ਤੁਰ ਜਾਣਾ ਤਾਂ ਤੁਰਤੀ ਬਾਣੀ ਨਾਲ ਜੋੜੋ। ਲੋ ਤਿਸ ਨੂੰ ਮਨ ਵਸਾਏ ਸੀ। ਜਾ ਕੋ ਨਦਰ ਕਰੇ। ਨਾਨਕ ਨਦਰੀ ਬਾਹਰੀ ਸਭ ਕਰਨ ਪਲਾਹ ਕਰੇ। ਇਸ ਨੂੰ ਮਾਨਵਸਾਇਸੀ ਸੀ ਗੁਰੂ ਦੇ ਵਿੱਚ ਬਸਾਉਣਾ ਚਾਹੀਦਾ ਹੈ। ਚਾਹ ਕੋ ਨਜ਼ਰ ਕਰੇ ਜਿਹੜਾ ਤੁਹਾਡੇ ਤੇ ਬੇਰ ਕਰੇ ਜਿਹੜਾ ਕਿਰਪਾ ਕਰਨ ਦੇ ਯੋਗ ਹੈ ਉਹਨੂੰ ਕਿੰਜ ਬਸਾਓ ਜਿਹੜਾ ਕਿਰਪਾ ਹੀ ਨਹੀਂ ਕਰ ਸਕਦਾ ਕੁਝ ਉਹਨੂੰ ਕਿੰਜ ਬਸਾ ਕੇ ਕੀ ਕਰੇ ਚਾਹ ਕੋ ਨਜ਼ਰ ਕਰੇ ਨਾਨਕਾ ਨਜ਼ਰੀ ਬਾਹਰ ਆ ਸਭ ਕਰਨ ਪਲਾਹ ਕਰੇ ਜਿੱਦੇ ਤੇ ਕਿਰਪਾ ਨਹੀਂ ਨਹੀ ਹੋਈ ਬਸ ਉਹ ਤਾਂ ਕਰਮ ਕਾਲ 'ਚ ਫਸਿਆ ਹੋਇਆ ਪਲਾਹ ਕਹਿੰਦੇ ਕਰਮ ਕਾਂ ਉਹ ਕਰਮ ਕਾਂ ਟੀ ਹੋਈ ਹੈ। ਇਹ ਤਾਂ ਕਰਪਾਣੀ ਹੋਈ ਦਾ ਦਰਬਾਰ ਡੇ ਰਹਿ ਗਿਆ ਠੀਕ ਹੈ ਜੀ ਤਿਸ ਨੂੰ ਮਨ ਵਸਾਏ ਸੀ ਇੱਥੇ ਟਿੱਪੀ ਲੱਗੀ ਹੋਈ ਆ ਉਹ ਤੋਂ ਐਂ ਲੱਗਦਾ ਵੀ ਤਿਸ ਨੂੰ ਮਨ ਇਹਨੂੰ ਪਹਿਲਾਂ ਤੂੰ ਮਨ ਫੇਰ ਵਸਾ ਇਸ ਤਰ੍ਹਾਂ ਗੱਲ ਹੈ ਜੀ ਜਦ ਇਹ ਮੇਕ ਪਠਾਇਆ 3 ਲੱਖ ਬੰਦ ਬੋਲੇ ਠੀਕ ਹੈ ਫਿਰ ਇੱਥੇ ਟਿੱਪੀ ਇਹਨਾਂ ਨੇ ਇੱਕ ਜ਼ਿਆਦਾ ਲਾਤੀ ਐ ਇਹ ਤਾਂ ਮਨ ਹੋ ਗਿਆ ਇਹ ਟਿੱਪੀ ਗਲਤ ਦੇਖੋ ਨਾ ਆ ਤੇ ਸਾਹ ਜਿਆ ਨਾ ਜਿੰਨੇ ਇਹ ਮੇਕ ਪਠਾਇਆ 3 ਲੱਖ ਬੰਦ ਬੋਲੇ ਮਨ ਵਸਾਇਆ ਸੀ ਉਸੇ ਨੂੰ ਉਲਝ ਪਸਾਉਣਾ ਚਾਹੀਦਾ ਜਿਹਦੀ ਪਿੱਛੇ ਗੱਲ ਕੀਤੀ ਹੈ ਠੀਕ ਹੈ ਇੱਥੇ ਵੀ ਟਿੱਪੀ ਇਹਨਾਂ ਨੇ ਟਿੱਪੀ ਲਾ ਕੇ ਫਿਰ ਇਹ ਪਹਿਲਾਂ ਉਹਨੂੰ ਮੰਨ ਵਸਾ ਪਰ ਇਹ ਹੈਗਾ ਵੀ ਇਸ ਨੂੰ ਚ ਵਸਾ ਹਾਂ ਨਜ਼ਰ ਕਰੇ ਕਹਿੰਦਾ ਕਿਰਪਾ ਉਸਨੇ ਦਲਦੀਆਂ ਨਾ ਮੈਂ ਕੱਲ ਵੀ ਉਹ ਅੱਖਰੋ ਦੀ ਕਰਦੀ ਉਹ ਤੇਰੇ ਠੀਕ ਹੈ ਜੀ ਜੀਨੇ ਮੇਕ ਬਿਠਾਇਆ ਉਹਨੇ ਕਿਰਪਾ ਕਰਨੀ ਹੈ ਜੀ ਜਿਹਨੇ ਵੇਖ ਪਠਾਇਆ ਤੇਰਪਾ ਉਹਦੀ ਚਲਣੀ ਹੈ ਜਿਹਨੇ ਵੇਖ ਪਠਾਇਆ ਜੀ ਨਾ ਉਹਦੀ ਨਜ਼ਰ ਦੀ ਨ ਕੋਈ ਉਹਨਾਂ ਦੇ ਬਾਹਰ ਹੀ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਗੁਰਨਾਨਕ ਦੀ ਕਿਰਪਾ ਉਹਦਾ ਆ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਉਹਦੀ ਨਜ਼ਰ ਤੋਂ ਬਾਹਰ ਹੀ ਰਹੇਗੀ ਜਦੋਂ ਆਪਾਂ ਅਰਦਾਸ ਕਰਦੇ ਆਂ ਫਿਰ ਆਪਾਂ ਅਰਦਾਸ ਪਰਮੇਸ਼ਰ ਨੂੰ ਕਰਨੀ ਹੈ ਜੀ ਪਰਮੇਸ਼ਰ ਨੂੰ ਗੱਲ ਆਪਾਂ ਨੂੰ ਇਹ ਗੱਲ ਵੀ ਸਾਫ਼ ਨਹੀਂ ਹੈ ਬਹੁਤ ਜ਼ਿਆਦਾ ਲੋਕ ਕੋਠੀ ਸਾਹਿਬ ਨੂੰ ਅਰਦਾਸ ਕਰਦੇ ਆਂ ਚਲੋ ਉਹਨਾਂ ਨੂੰ ਗਿਆਨ ਨਹੀਂ ਹੈ ਤਾਂ ਕਰੀ ਗੱਲ ਹੋ ਜੂ ਕ ਹਰ ਜਨ ਨੇ ਠੀਕ ਹੈ ਪਰ ਅਸਲ ਸਨਾਜ ਜੋ ਨੇਮ ਹੈ ਆਪਾਂ ਪਰਮੇਸ਼ਰ ਨੂੰ ਚੇਤਨੂ ਅਰਦਾਸ ਕਰਨੀ ਹੈ ਜੀ ਕੁਰਬਾਨੀ ਤਾਂ ਬੜਿਆਈ ਕਰ ਰਹੀ ਹੈ ਉਹ ਦੱਸ ਰਹੀ ਹੈ ਵੀ ਬੜਿਆਈ ਕਰਦੀ ਹੈ ਠੀਕ ਹੈ ਜੀ ਕਿਉਂਕਿ ਨਹੀਂ ਤਾਂ ਫਿਰ ਆਹੀ ਹਾਲਾਤ ਪੈਦਾ ਹੋ ਜਾਣਗੇ ਨਾ ਨਾਨਕ ਨਦਰੀ ਬਾਹਰੀ ਸਭ ਕਰਨ ਪਲਾਹ ਕਰੇ ਹੋ ਜਾਵੇ ਜੋ ਰਾਏ ਅਸ ਪਲਾਹ ਦਾ ਹੱਥ ਪੈਰ ਬਹੁਤ ਮਾਰਦੇ ਨੇ ਸੇਵਾ ਕਰਨਾਂ ਦੀਆਂ ਮੰਨ ਨੇ ਫਰਸ਼ਟਾ ਲੱਗਦੇ ਨੇ ਉਹਨਾਂ ਦੇ ਵਿੱਚ ਕੋਈ ਕਸੂਰ ਨਹੀਂ ਲੇਕਿਨ ਹੱਥ ਪੈਰ ਪੱਲੇ ਕੁਝ ਨਹੀਂ ਪਹਿਰੇ ਕਿ ਹੱਥ ਪੈਰ ਤਾਂ ਮਾਰ ਰਹੇ ਆ ਪਰ ਡੁੱਬਦੇ ਜਾ ਰਹੇ ਆ ਜੀ। ਕੋਈ ਕਸੂਰ ਨਹੀਂ ਦੱਸਣ ਵਾਲਿਆਂ ਦਾ ਕਸੂਰ ਹੈ। ਲੋ ਜੀ। ਕੋੜੀ ਸੋਹਰ ਕਰਤ ਨ ਲੱਗੈ ਵਾਰ ਆ ਆਕਾਸ਼ ਕਰ ਖਿਨਮੈ ਟਾਹੇ ਉਸਾਰਣ ਹਾਰ ਸੋਹਰ ਸਦਾ ਸਰੇਵੀਐ ਉਹਨਾਂ ਨੂੰ ਸਦਾ ਹੀ ਉਹਦੀ ਸੇਵਾ ਕਰਨੀ ਚਾਹੀਦੀ ਹੈ। ਤੇ ਇਹ ਰੋਜ਼ ਦੀ ਸੇਵਾ ਕਰਨੀ ਚਾਹੀਦੀ ਉਹਦੇ ਭਾਣੀ ਚੱਲਣਾ ਚਾਹੀਦਾ ਜਿਸ ਕਰਤਨ ਲੱਗ ਹੈ ਵਾਰ ਜਿਹਨੇ ਸਭ ਕੁਝ ਬਣਾਇਆ ਨਾ ਕੁਝ ਵੀ ਕਰ ਸਕਦਾ ਇਸ ਕਿਰਤ ਚ ਉਹ ਜੋ ਕੁਝ ਕਰਨਾ ਚਾਹੇ ਜੱਟਾ ਚ ਕਰ ਸਕਦਾ ਆਕਾਸ਼ ਨੇ ਆਕਾਸ਼ ਕਰ ਦੇਖੋ ਕਿੰਨਾ ਵੱਡਾ ਆਕਾਸ਼ ਬਣਾਇਆ ਖੇਲ ਦੇ ਟਾਏ ਉਸ ਤੋਂ ਸਾਡਾ ਹਾਲ ਖੇਲੇ ਇਹਨੂੰ ਟਾ ਕੇ ਉਸਾਰਨ ਉਸਾਰਾ ਐਡਾ ਵੱਡਾ ਤਾਂ ਨਾਲ ਕੋਈ ਸੱਟ ਮੈਣਾ ਕੋਈ ਪੀੜ ਪੈਗਾ ਹੋ ਸਕਦਾ ਹੋਰ ਵੀ ਕੋਈ ਹੋ ਸਕਦਾ ਇੰਨੇ ਵੱਡੇ ਆਕਾਸ਼ ਨੂੰ ਟਾ ਢੇੜੀ ਕਰ ਦੇ ਜਿੱਦੀ ਰਜਣਾ ਸਾਹਿਬ ਨੂੰ ਫਨਾ ਕਰ ਦੇ ਐਸਾ ਨਹੀਂ ਹੋਇਆ ਸਰਦਾਰ ਇੱਥੇ ਹਰ ਫਿਰ ਹੁਕਮ ਵਾਸਤੇ ਆਇਆ ਜੀ ਹੁਕਮ ਵਾਸਤੇ ਠੀਕ ਹੈ ਜੀ ਆਪੇ ਜਗਤ ਉਪਾਇਕ ਕੁਦਰਤ ਕਰੇ ਵਿਚਾਰ ਮਨਮੁਖ ਅੱਗੇ ਲੇਖਾ ਮੰਗੀ ਹੈ ਬਹੁਤੀ ਹੋਵੇ ਮਾਰ ਸਾਰਾ ਸਾਰ ਆਪੇ ਬਾਇ ਸਾਰਾ ਜਗਤ ਉਹ ਗੱਲ ਸੀ ਉੱਪਰ ਚੱਲੀ ਤੇ ਤੁਹਾਨੂੰ ਬੋਲਦੇ ਉਸੇ ਦੀ चल ਚੱਲਦੀ ਹੈ ਅੱਗੇ ਆਪੇ ਕਰਨ ਤੋਂ ਪਾਇਕ ਹੈ ਕੁਦਰਤ ਕਰੇ ਵਿਚਾਰ ਫਿਰ ਵਿਚਾਰ ਕਰਨੀ ਕੁਦਰਤ ਹੈ ਵਿਚਾਰ ਵੀ ਕਰਦਾ ਕਿ ਨੂੰ ਦੇਣ ਕਿੰਨੂੰ ਬਚਾਉਣ ਦੇ ਕਿੰਨੂੰ ਮਾਰਨ ਕਿੱਥੇ ਕੀ ਚਾਹੀਦਾ ਕਿੱਥੇ ਕੀ ਚਾਹੀਦਾ ਸਾਰਿਆਂ ਦਾ ਧਿਆਨ ਵੀ ਰੱਖਦਾ ਆਪੇ ਕਰੇ ਵਿਚਾਰ ਮਨਮੁਖ ਅੱਗੇ ਲੇਖਾ ਮੰਗੀ ਹੈ ਬਹੁਤੀ ਹੋਵੇ ਮਾਰ ਮਨਮੁਖਾਂ ਨੂੰ ਅੱਗੇ ਲੇਖਾ ਕਿੱਥੇ ਜਾਣਾ ਆਤਲ ਪੀੜੇ ਕਾਣੀ ਇਹਨਾਂ ਨੇ ਪੀੜ ਪੜਾਈ ਇਹਨਾਂ ਦੀ ਹੋਣੀ ਉਹ ਮੁੱਖਾਂ ਦੀ ਹਾਂਜੀ ਗੁਰਮੁਖੀ ਪਤ ਸਿਉ ਲੇਖਾ ਨਿਭੜੈ ਬਖਸ਼ੇ ਸਿਫਤ ਭੰਡਾਰ ਉਥੈ ਹੱਥ ਨਾ ਪੜੈ ਨਾ ਸੁਣੀਐ ਪੁਕਾਰ ਗੁਰਮੁਖਾਂ ਦਾ ਹਾਲ ਦੂਜਾ ਹੈ ਪਤ ਸਿਉ ਲੇਖਾ ਨਿਭੜੇ ਗੁਰਮੁਖਾਂ ਦਾ ਵਾਇਸਤ ਲੇਖਾ ਨਿਭੜ ਜੁੰਦਾ ਇੱਥੇ ਬਖਸ਼ੇ ਸਿਫਤ ਭੰਡਾਰ ਉਹਨੂੰ ਸੱਬਰ ਦੇ ਪ੍ਰਣਾਲ ਦੇ ਦਿੱਤੇ ਜਾਂਦੇ ਨੇ ਕਹਿੰਦੇ ਲੇਖਾ ਇੱਧਰ ਕਰੋ ਛੱਡੋ ਤੁਸੀਂ ਲੇਖੇ ਨੂੰ ਸਬਸਲਾ ਕਰੋ ਉਹਨਾਂ ਨੂੰ ਨਵੇਂ ਕੰਮ ਲਾ ਦਿੱਤਾ ਜਾਂਦਾ ਹੈ ਬਖਸ਼ੇ ਸਿਰਫ ਪ੍ਰਣਾਲ ਉੱਤੇ ਹੱਥ ਨਾ ਪੜੇ ਉੱਤੇ ਹੱਥ ਨਹੀਂ ਪੜਦਾ ਗੁਰਮੁਖ ਦਾ ਗੁਰਮੁਖ ਦਾ ਹੱਥ ਦੀ ਗੁਰਮੁਖ ਦੀ ਬੁੱਧੀ ਨਹੀਂ ਉੱਥੇ ਜਾ ਸਕਦੀ ਜੋ ਗੁਰਮੁਖ ਬੋਲਦਾ ਮਨੂੰ ਕੋਸ਼ਿਸ਼ ਕਰਦੇ ਤੇ ਉਹ ਗੱਲ ਨੂੰ ਸੁਧਣੀਂਦੀ ਵਰਮੋ ਕੋਸ਼ਿਸ਼ ਕਰਦੇ ਨੇ ਉਹ ਗੱਲ ਨੂੰ ਟੋਕਣ ਦੀ ਵੀ ਸ਼ਾਇਦ ਇਹ ਗਲਤ ਸਾਬਤ ਕਰਦੀਏ ਉਹਨਾਂ ਦਾ ਹੱਥ ਨਹੀਂ ਉੱਪਰਦਾ ਉੱਥੇ ਕੂਕਣਾ ਸੁਣ ਲੈ ਪੁਕਾਰ ਚਾਹੇ ਕੂਕ ਪੁਕਾਰ ਜਿੰਨੀ ਮਰਜ਼ੀ ਗੱਲਾਂ ਸੁਣਦਾ ਹੀ ਨਹੀਂ ਦਾ ਹੱਥ ਉੱਪਰਦਾ ਹੀ ਨਹੀਂ ਬੁੱਧੀ ਦਾ ਲੈਵਲ ਹੈ ਉੱਥੇ ਟੱਕਲੀ ਜਾਂਦਾ ਫਿਰ ਪਾਈ ਜਾਂਣ ਕੂਕ ਪੁਕਾਰ ਕਰਕੇ ਜਿੰਨੀਆਂ ਫਰਜ਼ੀਆਂ ਲਸਾਂ ਕਰੀ ਜਾਂਣ ਉਹਨਾਂ ਦਾ ਹੱਥ ਉੱਪਰ ਨਹੀਂਦੀ ਹੋਜੀ ਉੱਥੇ ਸਤਗੁਰ ਬੇਲੀ ਹੋਵੇ ਕੱਢ ਲੈ ਅੰਤਿਵਾਰ ਇਹਨਾਂ ਜਨਤਾ ਨੂੰ ਹੋਰ ਸੇਵਾ ਨਹੀਂ ਸਤਿਗੁਰ ਸਿਰ ਕਰਤਾਰ ਉਹ ਤੇ ਸਤਗੁਰ ਮੇਲੀ ਹੋਵੇ ਸਤਗੁਰ ਨੂੰ ਮੇਲੀ ਬਣਾਇਆ ਦੀ ਹੈ ਜੇ ਸਤਗੁਰ ਨੂੰ ਮੇਲੀ ਬਣਾਇਆ ਹੁੰਦਾ ਤਾਂ ਕੱਢ ਲੈ ਅੰਤਿਵਾਰ ਅੰਤਿਵਾਰ ਕੱਢਣੇ ਲੱਜਾਉਂ ਤੂੰ ਉਹ ਜਿੱਥੇ ਅੜੇ ਹੋਏ ਤੇ ਜਿਹੜੀ ਗੱਲ ਸੇਵਾ ਰਹੀ ਇਹਨਾਂ ਜਨਤਾ ਵਾਸਤੇ ਹੋਰ ਕੋਈ ਵੀ ਸੇਵਾ ਨਹੀਂ ਇਹਨਾਂ ਦੀ ਸੇਵਾ ਕੀ ਆ ਸ਼ਬਦ ਵਿਚਾਰ ਗੁਰ ਸ਼ਬਦ ਵਿਚਾਰ ਸੇਵਾ ਉਹ ਤਾਂ ਕੀਤਾ ਨਹੀਂ ਸ਼ਬਦ ਦੀ ਵਿਚਾਰ ਨਹੀਂ ਕੀਤੀ ਇਹਨਾਂ ਜਨਤਾ ਨੂੰ ਹੋਰ ਸੇਵਾ ਰਹੀ ਸਤਪੁਰ ਸਿਰ ਕਰਤਾਰ ਸਤਪੁਰ ਰਹਿਣੋ ਸਿਰ ਤੇ ਉਹੀ ਕਰਤਾਰ ਹੈ ਨਾ ਬਸ ਉਹਦੀ ਸੇਵਾ ਲਗਣਾ ਸੀ ਜੇ ਤਾਂ ਲੱਗੇ ਉਹਦੀ ਸੇਵਾ ਫੇਟਾ ਕੋ ਪ੍ਰਾਪਤੀ ਹੋ ਜੇ ਆਪਣੇ ਭਾਣੇ ਕੇ ਰਹੇ ਆਪਣਾ ਸੰਗਾਰੇ ਬੂਰੇ ਡਾ ਕੇ ਰੱਖਿਆ ਵਿਦੂਪਤਾ ਦੇ ਨਾਲੇ ਆਕੜੇ ਰਹੇ ਫਿਰ ਅੱਥ ਵੱਲੇ ਕੁਝ ਨਹੀਂ ਕਰਨ ਸਤਗੁਰ ਸਿਰ ਕਰਤਾਰ ਦਾ ਭਾਪ ਹੈ ਵੀ ਸਤਗੁਰ ਦੇ ਸਿਰ ਉੱਤੇ ਕਰਤਾਰ ਹੈ ਜੀ ਸਤਗੁਰ ਕਰਤਾਰ ਇਹਨਾਂ ਦੇ ਸਿਰ ਤੇ ਹੈ ਸਾਡੇ ਸਿਰ ਤੇ ਹੈ ਜੀਵਾਂ ਨੇ ਸਿਰ ਉੱਤੇ ਸਤਗੁਰ ਕਰਤਾਰ ਹਨ ਦੇ ਸਿਰ ਤੇ ਭਾਰ ਬ੍ਰਹਮ ਅੱਛਾ ਜੀ ਜਨਤਾ ਦੇ ਸਿਰ ਤੇ ਸਤਗੁਰ ਹੈ ਗੁਰਮੁਖ ਦੇ ਸਿਰ ਤੇ ਭਾਰ ਬ੍ਰਹਮ ਗੁਰਮੁਖ ਦੇ ਸਤਗੁਰਤਾ ਹੈ ਹਾਂਜੀ ਉਹਦੇ ਤੇ ਦਾ ਪਰਮਾਤਮਾ ਵੀ ਹੈ ਠੀਕ ਹੈ ਕਹਿੰਦਾ ਪਾ ਵੀ ਜਨਤਾ ਦਾ ਪ੍ਰਭ ਕਰਤਾਰ ਸਤਿਗੁਰ ਹੈ ਤੇ ਸਤਿਗੁਰ ਦਾ ਪ੍ਰਭ ਕਰਤਾਰ ਜਿਹੜਾ ਹੈ ਉਹ ਪਰਮ ਬ੍ਰਹਮ ਜੀ ਠੀਕ ਹੈ ਜੀ ਇੱਥੇ ਛੇਵੀਂ ਪੜਵੀ ਸਮਾਪਤੀ ਹੈ ਜੀ